ਅੰਜ ਦੇਵੀ ਗੁਣ ਬਣਾ ਦਿੱਤੇ ਇਹਨਾਂ ਦੇ ਸਾਹਮਣੇ ਇਹਨਾਂ ਦੀ ਆਪੋ ਵਿਚ ਲੜਾਈ ਆ ਸੰਸਾਰ ਵਿੱਚ ਇਹਨਾਂ ਵਿੱਚੋਂ ਕਿਹੜਾ ਜਿੱਤ ਜਾਏ ਕਿਹੜਾ ਹਾਰ ਜਾਏ ਇਹ ਸਮੇਂ-ਸਮੇਂ ਦੀ ਗੱਲ ਐ ਪਰ ਸਤਗੁਰਾਂ ਜਿੱਥੇ ਵੀ ਕਿਰਪਾ ਕੀਤੀ ਉੱਥੇ ਦੇਵੀ ਗੁਣ ਪ੍ਰਗਟ ਕਰਕੇ ਇਹਨਾਂ ਨੂੰ ਪਿੱਛੇ ਕਰ ਦਿੱਤਾ ਦੇਵੀ ਗੁਣ ਪ੍ਰਗਟ ਕਰਕੇ ਮਨੁੱਖ ਨੂੰ ਉੱਚਿਆਂ ਕੀਤਾ ਸੰਸਾਰ ਵਿੱਚ ਵਸ ਕਰੇ ਸਭੈ ਬਲ ਹੋਰ ਕੀ ਮਿਲਦਾ ਕਹਿੰਦੇ ਨੇ ਹੋਰ ਇਹ ਮਿਲਦਾ ਸਦਾ ਸੁਖ ਮਨ ਵਸੈ ਦੁਖ ਸੰਸਾਰ ਹਕ ਹੋਵੇ ਹਮੇਸ਼ਾ ਵਾਸਤੇ ਸੁਖ ਮਨੁੱਖ ਸੁਖੀ ਹੋ ਜਾਂਦਾ ਜਦੋਂ ਸਤਿਗੁਰੂ ਹਿਰਦੇ ਵਿੱਚ ਨਾਮ ਦਿੰਦੇ ਨੇ ਭਜਨ ਦੇ ਦਿੰਦੇ ਨੇ ਤੇ ਮਨੁੱਖ ਕੁਦਰਤੀ ਤੌਰ ਤੇ ਹੀ ਨਾਮ ਇੱਕ ਐਸਾ ਉੱਤਮ ਪਦਾਰਥ ਹੈ ਕਿ ਜਿਹੜਾ ਮਨੁੱਖ ਦੇ ਪਾਪਾਂ ਨੂੰ ਦੂਰ ਕਰਕੇ ਚਿੰਤਾ ਫਿਕਰ ਪਰੇਸ਼ਾਨੀਆਂ ਨੂੰ ਪਰੇ ਕਰਕੇ ਤੇ ਸੁਖ ਵਿੱਚ ਪਰਵੇਸ਼ ਕਰ ਜਾਂਦਾ ਬਲੋਕ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਤੇ ਤਰੀ ਜਾਓ ਜਨਮ ਹਮ ਕਾਲ ਖਤੋਵੈ ਗੁਰੂ ਨੋਂ ਨਿਧੀਆਂ ਦਾ ਦਰਿਆਓ ਹੈ ਸਤਗੁਰਾਂ ਨੂੰ ਦਰਿਆ ਦਾ ਦਰਜਾ ਦਿੱਤਾ ਗਿਆ ਗੁਰੂ ਹਸਤੀ ਨੂੰ ਦਰਿਆ ਦਾ ਕੀ ਕੰਮ ਹੈ ਕਿ ਪਹਾੜੀ ਇਲਾਕੇ ਵਿੱਚੋਂ ਉੱਚੇ ਨੀਵੇਂ ਥਾਵਾਂ ਦਾ ਪਾਣੀ ਇਕੱਠਾ ਕਰਕੇ ਦਰਿਆ ਦੀ ਸ਼ਕਲ اختیار ਹੁੰਦਾ ਹੈ ਤੇ ਉਹ ਦਰਿਆ ਦਾ ਕੰਮ ਹੈ ਕਿ ਉਸ ਪਾਣੀ ਨੂੰ ਸਮੁੰਦਰ ਤੱਕ ਪਹੁੰਚਾਉਣਾ ਇਹ ਦਰਿਆ ਦੀ ਡਿਊਟੀ ਹੈ ਉਹਨੂੰ ਸੰਭਾਲ ਕੇ ਰੱਖਣਾ ਆਪਣੇ ਕੰਡਿਆਂ ਦੇ ਅੰਦਰ ਜਿਉਂ ਤੋਰਨੇ ਸਮੁੰਦਰ ਨਾਲ ਮਿਲਾਪ ਕਰਾਉਣਾ ਉਸ ਪਾਣੀ ਦਾ ਇਹ ਸਮੁੰਦਰ ਦੀ ਡਿਊਟੀ ਹੈ ਦਰਿਆ ਦੀ ਡਿਊਟੀ ਹੈ ਤੇ ਇਹੋ ਹੀ ਡਿਊਟੀ ਸਤਗੁਰਾਂ ਦੀ ਆ ਗਈ ਸਭ ਤੋਂ ਵੱਡਾ ਕਰਮ ਸਤਗੁਰਾਂ ਦਾ ਕਿ ਮਨੁੱਖ ਦੀ ਬਿਰਤੀ ਸੰਸਾਰ ਵਿੱਚ ਖਚਤ ਹੈ ਪਰਿਵਾਰ ਵਿੱਚ ਪਰਵਿਰਤ ਹੈ ਵਿਹਾਰ ਵਿੱਚ ਖਚਤ ਹੈ ਇਹਦੇ ਨਾਲੋਂ ਤੋੜ ਕੇ ਕਰਤਾਰ ਨਾਲ ਨਿਰੰਕਾਰ ਨਾਲ ਜੋੜ ਦੇਣਾ ਇਹ ਸਤਿਗੁਰਾਂ ਦਾ ਕੰਮ ਹੈ ਇਸ ਵਾਸਤੇ ਸਤਿਗੁਰਾਂ ਨੂੰ ਦਰਿਆ ਦਾ ਦਰਜਾ ਦਿੱਤਾ ਗਿਆ ਪਰ ਦਰਿਆ ਦਾ ਤੇ ਪਾਣੀ ਦਾ ਖਜ਼ਾਨਾ ਹੈ ਨਾ ਦਰਿਆ ਤੇ ਪਾਣੀ ਦਾ ਖਜ਼ਾਨਾ ਹੈ ਸਤਿਗੁਰੂ ਨੌ ਦਿੱਤੀਆਂ ਦੇ ਖਜ਼ਾਨੇ ਨੇ ਗੁਰਨਾਮ ਦੇ ਤੇ ਦਰਿਆਓ ਇਹਨੂੰ ਲੋਕੀ ਲੱਭਦੇ ਫਿਰਦੇ ਨੇ 18 ਸਦਹੀਆਂ ਤੇ 9 ਨਦੀਆਂ ਦੀ ਬੜੀ ਲੰਬੀ ਕਥਾ ਹੈ ਦੁਨੀਆ ਵਿੱਚ ਚਾਹੀਦੀਆਂ ਨੇ ਘਰਾਂ ਵਿੱਚ ਤੇ ਪਾਦਸ਼ਾਹ ਕਹਿੰਦੇ ਨੇ ਗੁਰ ਨਾਮ ਨੇ ਤੇ ਦਰਿਆਓ 9 ਦਿੱਦੀਆਂ ਦਾ ਦਰਿਆ ਖਜ਼ਾਨਾ ਹੈ ਸਤਿਗੁਰੂ ਜਨਮ ਹਮ ਕਾਲ ਖਤੋਵੇ ਮਨੁੱਖ ਦੇ ਜਨਮਾਂ ਜਨਮਾਤਰਾਂ ਦੀ ਕਾਲ ਖਲਾ ਕੇ ਧਰ ਦਿੱਤੀ ਸਤਿਗੁਰਾਂ ਨੇ ਫਿਰ ਕਹਿੰਦੇ ਨੇ ਤਲ ਪੱਟ ਕਹਿ ਰਿਹਾ ਕਹਿੰਦਾ ਸੋਖੋ ਤਲ ਗੁਰ ਸੇਵੀਆ ਆਹਨ ਸਹਾਜ ਸੁਭਾਏ ਗੁਰਮਖੋ ਜਿਹੜੇ ਲੋਕ ਸਤਗੁਰੂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਰਾਤ ਦਿਨ ਉਹਨਾਂ ਵਾਸਤੇ ਕੀ ਹੁਕਮ ਹੈ ਅੱਗੇ ਹੁਣ ਦਰਸ਼ਨ ਦੀ ਮਹਾਨਤਾ ਸਾਜਾ ਨਾਲ ਕਹਿ ਲੈਂਦੇ ਆ ਸਹਾਜ ਆ ਹੀ ਗਏ ਨੇ ਦਰਸ਼ਨ ਦੀ ਮਹਾਨਤਾ ਆ ਗਈ ਹੈ ਕਹਿੰਦੇ ਨੇ ਜਨਮ ਮਰਨੇ ਦੁੱਖ ਜਾਏ ਦਰਸ਼ਨ ਗੁਰੂ ਮਬਦਲ ਦੇ ਦੁਖ ਜਾਏ ਦਰਸ਼ਨ ਪਰਸਿਆ ਮਬਦਲ ਦੇ ਦੁਖ ਗੁਰੂ ਕੈ ਜਦਮ ਮਰਨ ਦੁਖ ਜਾਏ ਮ ਮਦਨ ਦੇ ਦੁੱਖ ਜਾਏ ਦਰਸ਼ਨ ਪਰਸਿਆ ਆ ਜਦ ਮਦਨ ਦੇ ਦੁੱਖ ਜਾਏ ਦਰਸ਼ਨ ਪਰਸਿਆ ਆ ਆ ਜੀ ਜਨਮ ਮਰਨ ਦੁੱਖ ਜਾਏ ਜਨਮ ਮਰਨ ਦੁੱਖ ਜਾਏ ਜਨਮ ਮਰਨ ਦੁੱਖ ਜਾਏ ਇਹ ਜਨਮ ਮਰਨ ਦੁੱਖ ਜਾਏ ਦੁੱਖ ਜਾਏ ਦੁੱਖ ਜਾਏ ਗੁਰੂ ਕੇ ਕਰ ਰਿਹਾ ਸੀ